ਬੜੀ ਖੁਸ਼ੀ ਦੀ ਗੱਲ ਉਹਨਾਂ ਦਾ ਪਰਜਰਮ ਦਿਨ ਮਨਾਇਆ ਮਾਮਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਨੇ ਜਦੋਂ ਆਸੇ ਨਾਮ ਕੇਵਲ ਨਾਮ ਗੁਰੂ ਨਾਨਕ ਸਾਹਿਬ ਨੇ ਆਣ ਕੇ ਕਿਹਾ ਕਿ ਮੈਂ ਤੁਹਾਡੇ ਵਾਸਤੇ ਨਾਮ ਹੀ ਲਿਆਇਆ ਤੇ ਜਿਸ ਨਾਲ ਤੁਹਾਡੇ ਮਨਾਂ ਨੂੰ ਸਫਾਈ ਮਿਲੇਗੀ ਤੁਹਾਡੇ ਮਨਾਂ ਦੇ ਵਿੱਚ ਗਿਆਨ ਆਏਗਾ ਤੁਹਾਡੇ ਮਨਾਂ ਦੇ ਵਿੱਚ ਗਿਆ ਹੈਗੀ ਸੋ ਜਦੋਂ ਤਿਆਰ ਆਏਗਾ ਬਾਬਾ ਸ੍ਰੀ ਨੇ ਉਹ ਸਿੱਖਿਆ ਨਵੇਂ ਨਾ ਜਾਗਾ ਗਿਆ ਜੋ ਸਮਾਧੀ ਦੇ ਵਿੱਚ ਬੈਠ ਗਿਆ ਅਗਲੀ ਸਮਾਧੀ ਲਈ ਦਾ ਕੋਈ ਉਸ ਪ੍ਰਮਾਤਮਾ ਦਾ ਜੋ ਕੋਈ ਤੇਤ ਨਹੀਂ ਗਿਆ ਆ ਹੋ ਗਿਆ ਬਾਬਾ ਸ੍ਰੀ ਚੰਦ ਨੇ ਬੜੇ ਸੰਗਰਸ ਦੇ ਦਿੱਤੀ ਉਸ ਵੇਲੇ ਦੇਖਿਆ ਗਿਆ ਇੱਕ ਬੜਾ ਸੰਗਰਸ ਹੋਇਆ ਸੀ ਉਹਨਾਂ ਮੌਕਿਆਂ ਦੇ ਵਿੱਚ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਿਰੇ ਦੇ ਅੰਦਰ ਹੀ ਗਏ ਗੁਰwali ਆ ਗਏ ਪਰ ਵਾਪਸ ਜਿੱਦਣ ਨੇ ਉਸ ਵੇਲੇ ਦੇ ਦੀ ਜਿਹੜੀ ਸਿੱਖਿਆ ਸੀ ਉਹਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਉਹਨਾਂ ਦੀ ਜ਼ੁਬਾਨ ਦੇ ਪ੍ਰਗਟਾਸ਼ ਤੇ ਜਿੱਥੇ ਬੋਲਦੇ ਸੀ ਉਹਨਾਂ ਸ਼ਾਨ ਇੱਕਦਮ ਵੱਧ ਜਾਂਦਾ ਅਲਸਾਂ ਦਾ ਵਕਰੀ ਕੀ ਜੇ ਗੜਖਤਾ ਉਤੇ ਜੇ ਸਰੋ ਤੇ ਵੀ ਅਸਰ ਹੋ ਜਾਂਦਾ ਸੀ ਕਿਉਂ ਵਾਪਸ ਰਿਚੰ ਬ੍ਰह्म ज्ञानी ਹੋ ਚੁੱਕੇ ਸੀ ਜੇ ਜਾਤ ਕੀ ਹੁੰਦੀ ਹੈ ਬ੍ਰह्म ਗਿਆਨ ਉਹਦੀ ਗੋਤ ਕੀ ਹੁੰਦੀ ਹੈ ਗਿਆਨ ਉਹਦਾ ਨੇਚਰ ਕੀ ਹੁੰਦਾ ਹੈ ਬ੍ਰह्म ਗਿਆਨ ਇਸ ਕਰਕੇ ਸਾਡੇ ਗੁਰੂ ਸਾਹਿਬਾਨ ਨਾਨਕ ਰਿਚੰ ਜੀ ਹਮ ਬੜੀ ਆਗ ਦਾ ਮੜਾ ਇਤਕਾਰਦੇ ਰੇ ਸ੍ਰੀ ਦੇ ਨਾਮ ਹੀ ਮਹਾਰਾਜਾ ਗੋਸ਼ ਗਿਆਨ ਹੋਇਆ ਤੇ ਨਾਲ ਗਏ ਤੇ ਜਦੋਂ ਪਲਾ ਸਾਹਿਬ ਦੇ ਵਿੱਚ ਜਲ ਛੱਡਿਆ ਕਰਨਤਾਨ ਸਾਹਿਬ ਉਹ ਜਿਹੇ ਵੀ ਬਾਬਾ ਫਰੀਦ ਚੰਣੇ ਕੋਲ ਜਾ ਕੇ ਇੱਕ ਬੜਾ ਪਵਿੱਤਰ ਅਸਥਾਨੇ ਨਾਲ ਜਲ ਜਾਂਦਾ ਜੋ ਤੇ ਬੌਰੀ ਸਾਹਿਬ ਬਣਿਆ ਬਾਟਾ ਬਟਾ ਸਾਹਿਬ ਅੰਮ੍ਰਿਤ ਗੁਰੂ ਹਰਗੋਬਿੰਦ ਸਾਹਿਬ ਜੀ ਉੱਤੇ ਗਏ ਉਹਨਾਂ ਨੇ ਵੀ ਜਾ ਕੇ ਜਿਹੜਾ ਸਾਡਾ ਸਹਿਬ ਜੀ ਉਸ ਵੇਲੇ ਉਹਨਾਂ ਨੂੰ ਚੜਾਇਆ ਤੇ ਨਾਲ ਬੜਾ ਆਦਰ ਬੜਾ ਪਿਆਰ ਕੀਤਾ ਚੀਜ਼ਾਂ ਸਾਰੀਆਂ ਸਾਡੀਆਂ ਮਿਲਦੀਆਂ ਨੇ ਜਿਸ ਵਾਪਸ ਸ੍ਰੀ ਚੰਦ ਜੀ ਲੈਤੀ ਉਹ ਜੋ ਗੁਰ ਮਰਜਾਦਾ ਸੀ ਗੁਰੂਆਂ ਦੇ ਹੁਕਮ ਸੀ ਉਹਨਾਂ ਨੂੰ ਪੂਰੇ ਲੋਕਾਂ ਨੂੰ ਜੋੜਦੇ ਰਹਿ ਨਾਮ ਦੇ ਨਾਲ ਜੋੜਦੇ ਰਹਿ ਗਿਆਨ ਦੇ ਨਾਲ ਜੋੜਦੇ ਰਹਿ ਸਮਾਧੀਆਂ ਦੇ ਨਾਲ ਜੋੜਦੇ ਰਹਿ ਪਰ ਬਾਬਾ ਸ੍ਰੀ ਚੰਦ ਦੇ ਬਾਰੇ ਬਹੁਤਾ ਪ੍ਰਚਾਰ ਨਹੀਂ ਕੀਤਾ ਗਿਆ ਇਹ ਕਰਕੇ ਨਹੀਂ ਕੀਤਾ ਗਿਆ ਕਿ ਕੋਈ ਐਸਾ ਪ੍ਰਚਾਰ ਕਾਣੇ ਬਾਬਾ ਸ੍ਰੀ ਚੰਦ ਦਾ ਪਹਿਲਾਂ ਕੋਈ ਵੀ ਲੋਕਾਂ ਦੇ ਸਾਹਮਣੇ ਨਹੀਂ ਲਿਆ ਜੇ ਜਿਵੇਂ ਹੋ ਦੇਖੀਏ ਕਿ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਗਲ ਦੇ ਰਾਮ ਨਾਮ ਨਸਕਾਰਾ ਪਰ ਨਸਕਾਰਾ ਦਾ ਬਾਬਾ ਸ੍ਰੀ ਚੰਦ ਨੇ ਸਦਾ ਗਏ ਉਹ ਟਿਕਾ ਦੇ ਚਲੇ ਗਏ ਬਾਬਾ ਸ੍ਰੀ ਚੰਦ ਜਿਨੂੰ ਆਂਦੇ ਬ੍ਰਹਮ ਗਿਆਨੀ ਜੰਮੇ ਨਾ ਮਰੇ ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਦਾ ब्रह्म ज्ञानी यहां परमेश्वर ब्रह्म ज्ञानी की गत ब्रह्म ज्ञानी जाने ओ सिरे जेला ज्ञान श्री बाबा श्रीचंद दा ओ सिरे बड़े-बड़े उस मौके दे, दे। येले नवाब लोग सी जेले सलाम रो वंदन वाले लोग सी जेले हर मजनू वंदन वाले लोग सी बाबा श्रीचंद दी को सारे जाके मेरा लende रहे बख्शा लende ਉਹਦੇ ਕੁੱਝੇ ਆਰਪੀਆ ਵੀ ਬੰਦ ਕੀਤੇ ਜਾਂਦੀਆਂ ਸੀ। ਜੀ ਸਾਡੇ ਸੂਰ ਦੇ ਖਿਲਾਫ। ਫਿਰ ਕਈ ਵਾਰ ਨੇ ਉੱਥੇ ਕਈ ਬੈਠੇ ਹੋਈ ਸੀ। ਕਸ਼ਮੀਰ ਉਹਦੇ ਕਲਪੜਾ ਲਵਟ ਬੋਲਿਆ ਗਿਆ ਕਿ ਤੁਸੀਂ ਆਰਪੀਆ ਕਿਉਂ ਕਰਦੇ ਜੀ ਆਰਪੀਆ ਕਰ ਨਾਲ ਹੀ ਹੋ ਚੁੱਕੇ ਨੇ। ਤੇ ਬਾਬਾ ਜੀ ਨੇ ਪਰਵਾਹ ਕੀਤਾ ਕਿ ਨਹੀਂ। ਕੋਈ ਵੀ ਇਸ ਦੁਨੀਆ ਤੇ ਖਤਮ ਨਹੀਂ ਹੁੰਦੀ ਕਿਉਂ ਪਰਮਾਤਮਾ ਜਿਹੜਾ ਹਰ ਚੀਜ਼ ਨੂੰ ਤਾਕਤ ਦੇਣ ਵਾਲਾ ਹੈ ਹਰ ਚੀਜ਼ ਨੂੰ ਲਹਿਰ ਦੇਣ ਵਾਲਾ ਸੀ ਤੇ ਹਰ ਦੀ ਜ਼ੋਰ ਦੀਆਂ ਤਿੰਨ ਲਾਟਾਂ ਲਗੜੀਆਂ ਤੇ ਉੱਥੇ ਇੱਕਦਮ ਪੀਪੀਆਂ ਬਣ ਗਈਆਂ ਉਹ ਦ੍ਰਿਸ਼ ਅਜੇ ਦਿਖਾਇਆ ਫਿਰ ਬਾਬਾ ਸ੍ਰੀ ਚੰਦ ਨੇ ਉੱਥੇ ਆਰਤੀ ਕਰਾਈ ਉਹ ਬਾਬਾ ਜਿੱਤ ਕੰਦ ਨੇ ਬਹੁਤ ਜਾੜੇ ਸਜਰਤ ਦੇ ਲੰਗੇ ਨੇ ਪਰ ਉਹਨਾਂ ਦੀ ਨਜ਼ਰ ਦੇ ਵਿੱਚ ਇੱਕ ਮੜੀ ਵੱਡੀ ਤਲਵਾਰ ਸੀ ਕਿਹੜੀ ਤਲਵਾਰ ਜਿਹੜੀ ਨਜ਼ਰ ਦੇ ਨਾਲ ਹੋਮੇ ਸੀ ਉਹਨੂੰ ਕੱਢੀ ਲੱਗੀ ਗਈ ਜਿਹੜੇ ਲੋਕਾਂ ਦੇ ਮਨ ਬੜੇ ਭਰੇ ਹੋਏ ਸੀ ਕਰੋਧ ਦੇ ਨਾਲ ਲੋਕ ਦੇ ਨਾਲ ਉਹਨਾਂ ਨੂੰ ਸਾਥ ਹੀ ਕਰ ਦਿੱਤੀ ਬਾਬਾ ਜੀ ਦਾ ਪਹਿਲੀ ਵੱਡੀ ਹਸਤੀ ਹੈ ਯਾਦ ਜੇ ਉਹਨਾਂ ਦਾ ਪੂਰਾ ਵਰਣਨ ਕਰੀਏ ਤੇ ਮੇਰਾ ਉਹਨਾਂ ਨੂੰ ਵਰਣਨ ਕਰਨਾ ਬੜਾ ਮੁਸ਼ਕਲ ਜੁੜੇ ਹੁੰਦੇ ਨੇ ਪਰ ਲਾ ਕੇ ਹੌਟ ਗਏ ਤੇ ਹਾਂ ਜਿਹੜੇ ਚਲੇ ਗਏ ਜਿਹੇ ਜਿਵੇਂ ਨਾ ਉਹ ਜਮਨ ਦਾ ਧਾਰੇ ਨਾ ਉਹ ਮਰਨ ਦਾ ਧਾਰੇ ਨਾ ਉਹ ਔਮ ਦਾ ਧਾਰੇ ਨਾ ਉਹ ਜਾਨ ਦਾ ਧਾਰੇ ਫਿਰ ਬ੍ਰਹਮ ਦੇ ਵਿੱਚ ਬ੍ਰਹਮੀ ਹੋ ਗਏ ਅਹੇ ਦਾਕੇ ਬਾਬਾ ਸ੍ਰੀ ਚੰਦਾ ਜੀਵਨ ਐਨਾ ਪਵਿੱਤਰ ਜੀਵਨ ਹੈ ਐਨਾ ਰਵਾਨੀ ਜੀਵਨ ਹੈ ਐਨਾ ਮਿਹਰਬਾਨੀ ਦਾ ਜੀਵਨ ਹੈ ਕੋਈ ਨ ਪੱਕਾ ਕੋ ਆਕਰ ਕਰਦਾ ਹੈ ਬਾਬਾ ਸ੍ਰੀ ਚੰਦਾ ਕੋ ਨਾ ਲੈਂਦਾ ਜੁਰੂ ਨਾਨਕ ਸਾਹਿਬ ਨੇ ਖੁਸ਼ੀਆਂ ਦਾ ਕੋਈ ਹੱਥ ਬਣਦਾ ਨਹੀਂ ਬਣਦਾ ਕਿਉਂ ਮਾਰੇ ਪ੍ਰਮਾਨ ਕਰਦੇ ਨੇ ਹੁਕਮ ਮੰਨਿਆ ਹੋਇਆ ਪ੍ਰਵਾਣ ਕਸ਼ਮੇ ਦਾ ਮਹਿਲ ਪਾਇਤੀ ਬਾਬਾ ਸ੍ਰੀ ਚੰਦ ਨੇ ਹੁਕਮ ਮੰਨ ਲਿਆ ਜਿਹੜਾ ਹੁਕਮ ਨਾਮ ਕਰਨ ਦਾ ਸਤ ਬੋਲਣ ਦਾ ਉਰਾਤ ਕਰਨ ਦਾ ਪਿਆਰ ਕਰਨ ਦਾ ਇਹ ਕਰਕੇ ਬਾਬਾ ਸ੍ਰੀ ਚੰਦ ਫੈਗੋ ਦੀ ਬਾਵਰ ਗੁਰੂਏ ਨੇ ਪਰ ਉਹਨਾਂ ਨੂੰ ਉਸ ਜਿਹੇ ਮੰਨਣ ਵਾਲੇ ਇੱਕ ਧਰਮ ਦੇ ਬੰਦੇ ਨਹੀਂ ਸੀ ਮੰਨਦੇ ਇੱਕ ਜਾਤ ਦੇ ਬੰਦੇ ਨਹੀਂ ਸੀ ਮੰਨਦੇ ਉਹਨਾਂ ਦੀ ਸਤ ਸੋ ਤੋਂ ਸੇ ਸਭ ਤੋਂ ਵੱਡੀ ਗੇਂਟੀ ਸੀ ਸੀ ਮਾਪਾ ਸ੍ਰੀ ਜਾਂਦੇ ਮੰਦਨ ਵਾਲਿਆਂ ਦੀ ਉਹਨਾਂ ਜੀ ਰਿਪੋਰਟ ਮੁਗਾਈ ਗਈ ਕਿ ਸਭ ਤੋਂ ਪੂਜਾ ਸਭ ਤੋਂ ਜ਼ਿਆਦਾ ਹੈ ਸੇ ਮੰਦਰ ਕਿੰਦੇ ਨੇ ਸਭ ਤੋਂ ਵੱਧ ਆਮਾਨ ਤੇ ਆਦਰ ਕਿੰਦਾ ਹੈ ਉਹ ਜਿਹੜੇ ਬਾਬਾ ਸ੍ਰੀ ਜਾਂਦਾ ਸਭ ਤੋਂ ਜ਼ਿਆਦਾ ਉਹਨਾਂ ਦੀ ਗੇਂਟੀ ਆਈ ਸਭ ਤੋਂ ਜ਼ਿਆਦਾ ਉਹਨਾਂ ਦੇ ਸਤਾਨ ਬਣੇ ਸੀ ਸਭ ਤੋਂ ਜਾਦੀ ਉਹਨਾਂ ਦੀ ਪੂਜਾ ਹੋ ਰਹੀ ਸੀ ਪਰ ਆਮ ਮਜੋਦ ਕਰਦਾ ਸੀ ਉੱਥੇ ਕੋਈ ਸਵਾਲ ਨਹੀਂ ਸੀ ਕਿ ਮੁਸਲਮਾਨ ਹੈ ਇਹ ਹਿੰਦੂ ਹੈ ਇਹ ਕਾਸ਼ੀ ਹੈ ਕੋਈ ਰਾਜਸਤਾਨੀ ਸਾਰੇ ਮੰਨਦੇ ਸੀ ਪਿਆਰ ਦੇ ਨਾਲ ਇਹ ਕਰਕੇ ਬਾਬਾ ਫਰੀਦ ਜਰੂਰ ਉਹ ਮੰਨੰਗ ਦੇ ਨਾਲ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਆਪਾਂ ਨੂੰ ਹਰ ਵੇਲੇ ਸੋਚਣਾ ਚਾਹੀਦਾ ਹੈ कि बाबा श्रीचंद ब्रह्म ज्ञानी दिन के बारे सुभनी साहब ਦੇ ਵਿੱਚ ਕਹਿਆ ਗਿਆ ਹੈ ਸੰਸਜ ਦੇ ਬਾਰੇ ਵਰਣਨ ਕੀਤਾ ਆਇਆ ਹੈ ब्रह्म ज्ञानी ਦੇ ਬਾਰੇ ਵਰਣਨ ਕੀਤਾ ਹੈ ਜੇ ਆਪ ਅ챙ੀ ਕਰ ਬੈਠ ਕੇ ਆਪ ਦੇ ਅੰਦਰ ਧਿਆਨ ਨਾਲ ਵੇਖਾਂਗੇ बाबा श्रीचंद ਉੱਤੇ ਹੀ ਲੱਗਦਾ ਲੱਗਦੀ ਹੈ ਤੋਂ बाबा श्रीचंद ਦਾ ਤੇਰਾ ਬਤਾ ਉਹ ਬੇਤ ਨਹੀਂ ਸਹਿ ਗਿਆ ਜੋ ਜਨਵਾਰ ਵੀ ਪਿਆਰ ਹੀ ਕਰਦੇ ਨੇ ਉਹ ਦਸਤਾਰਾਂ ਨੂੰ ਪਿਆਰ ਕਰਦੇ ਰਹਿੰਦੇ ਸੀ ਜੁਮਿਸ਼ਾ ਵਾਂਗ ਜਦੋਂ ਬ੍ਰह्म ਬਾਬਾ ਜੀ ਵਰਗੇ ਬ੍ਰह्म ਗਿਆਨ ਦੇ ਦਸਤਾਰ ਨੂੰ ਪਿਆਰ ਕਰਦੇ ਨੇ ਧਰਤੀਆਂ ਵੀ ਪਿਆਰ ਕਰਦੇ ਨੇ ਉਸ ਜਿਹੇ ਜਾਨਵਰ ਵੀ ਪਿਆਰ ਕਰਦੇ ਨੇ ਕਿ ਬਾਬਾ ਫਰੀਦ ਜੰਮਨੇ ਆਪ ਦੀਆਂ ਸਵਾਦੀਆਂ ਦੇ ਨਾਲ ਆਪ ਪਿਆਰ ਦੇ ਨਾਲ ਆਪ ਦੀ ਦੇ ਨਾਲ ਰਾਬੇ ਨਾਲ ਇੱਕ ਵੇਕੀ ਹੋ ਗਿਆ ਹੈ ਉਹਨਾਂ ਦੀ ਜਵਾਨ ਦੇ ਉੱਤੇ ਐਸੀ ਤਾਕਤਾਈ ਲਈ ਸੀ ਨਜ਼ਰ ਦੇ ਵਿੱਚ ਐਸੀ ਤਾਕਤਾਈ ਆਈ ਸੀ ਜਿੱਦੜ ਸੀ ਉਹ ਸੀ ਜਿੱਦੜ ਸੀ ਹਰ ਜਗ੍ਹਾ ਦੇ ਹੁੰਦਾ ਸੀ ਮਾਪਾ ਤੇ ਇੱਕਦਮ ਬਹੁਤ ਵੱਡੀ ਮਾਨ ਸ਼ਕਤੀ ਹੋਈ ਏ ਜਿਹਦਾ ਬਿਆਨ ਕਰਨਾ ਬਹੁਤ ਮੁਸ਼ਕਲ ਏ ਹਾਂ ਦੇ ਐਸਐਟ ਵੀ ਦੇਖਣ ਲਈ ਆ ਕਿਤੇ ਮਰੇ ਅਸੀਂ ਬਲੇਕਾ ਬਾ ਦਿੰਨੇ ਆ ਕਿ ਗੁਰੂ ਸਾਹਿਬ ਨਾਲੋਂ ਬਾਬਾ ਫਰੀਦ ਜੰਦਾ ਕੋ ਵੱਖਰਾ ਪ੍ਰੋਗਰਾਮ ਸੀ ਨਹੀਂ ਬਾਬਾ ਫਰੀਦ ਜੰਦਾ ਪ੍ਰੋਗਰਾਮ ਹੋ ਸੀ ਜੇਲਾ ਗੁਰੂ ਨਾਨਕ ਸਾਹਿਬ ਨੇ ਕਿਹਾ ਤੇ ਨਾਮ ਥੰਡਾ ਮੈਨ ਲਾ ਕੇ ਸੱਚ ਵੇ ਬਾਬਾ ਫਰੀਦ ਜੰ ਉਸ ਨਾਮ ਦੇ ਨਾਲ ਹੀ ਦੁਨੀਆ ਨੂੰ ਸ਼ਾਂਤੀ ਦਿੰਦੇ ਰਹੇ ਦੁਨੀਆ ਦੇ ਮਨੁੱਖੀ ਬਦਲਦੇ ਰਹੇ ਕੌਣ ਦੁਨੀਆਂ ਨੂੰ ਪਿਆਰ ਵੀ ਸਿਖਾਉਂਦੇ ਰਹਿ ਪਰ ਹਰ ਵੇਲੇ ਗੁਰੂ ਨਾਨਕ ਸਾਹਿਬ ਦੇ ਨਾਲ ਚਵੀ ਕਹਿਡੇ ਜੋੜਦੇ ਰਹਿ। ਉਹ ਜਿਹੜੇ ਆਪਣਾ ਨਾਂ ਲੈਨੇ ਚੰਡਿਆਂ ਦੇ ਕਮਾਈ ਦਾ ਧਿਆਨ ਕਰਕੇ ਹਰ ਜਗ੍ਹਾ ਤੇ ਇੱਕ ਦਾਸੀ ਬੈਠਾ ਹੁੰਦਾ ਸੀ। ਭਾਵੇਂ ਕਲੇਗਾਂ ਦੇ ਹਰ ਜਗ੍ਹਾ ਦੇ ਜਦੋਂ ਨੰਦਗੁਰ ਸਾਹਿਬ ਨੇ ਮਾਲੇ ਨੇ ਛੱਡਿਆ ਉਹ ਤੇ ਇੱਕ ਦਾਸੀ ਉੱਤੇ ਬੈਠਾ ਹਾ। ਅਸੀਂ ਇੱਕ ਕੀ ਅਸੀਂ ਇਹਨਾਂ ਨੂੰ ਵੱਖਰਾ ਨਹੀਂ ਕਰ ਸਕਦੇ ਜਿਹੜੇ ਨਾ ਜੁੜਿਆ ਹੁੰਦੇ ਸਾਡੇ ਮਾਸ ਦੇ ਨਾਲ ਬਾਬਾ ਫਰੀਦ ਜੀ ਦਾ ਪ੍ਰੋਗਰਾਮ ਬਾਬਾ ਫਰੀਦ ਜੀ ਦਾ ਗਿਆਨ ਬਾਬਾ ਫਰੀਦ ਜੀ ਦਾ ਪਿਆਰ ਉਹ ਇਤਨਾ ਜੁੜਿਆ ਹੋਇਆ ਹੈ ਪਾਵਰਫੁੱਲ ਹੋਇਆ ਗੁਰੂ ਘਰ ਮਾਝਾ ਵੜੀਆਂ ਸਭ ਜਗਾਂ ਦੇ ਨਾਲ ਜਿੱਥੇ ਬਾਬਾ ਕ੍ਰਿਸਟIAN ਦਾ ਫੋਟੋ ਰੱਖਦੇ ਸੀ ਉਨਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਿਆ ਪਰ ਗੁਰੂ ਨਾਨਕ ਸਾਹਿਬ ਦਾ ਆਕਰ ਦਾ ਜਿਹੜਾ ਤੁਸੀਂ ਆਰਦਾਸ ਪੜ੍ਹਦੇ ਹੋ ਉਹਦੇ ਚਾਪ ਅਰਦਾਸ ਹੀ ਦਿੱਤਾ ਹੈ ਕਿ ਬਾਬਾ ਫਰੀਦ ਜਰੂ ਗੁਰੂ ਨਾਨਕ ਸਾਹਿਬ ਨੂੰ ਮੇਰਾ ਮੰਨਦੇ ਰਹਿ ਹਰ ਜਾਲਾ ਰੋਜ ਗੁਰੂ ਨਾਨਕ ਸਾਹਿਬ ਨੂੰ ਵੇਦੇ ਰਹਿ ਤਾਰੀਆਂ ਜਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਆਰਤੀ ਵੇ ਦੇ ਰਹਿ ਗਿਆਨ ਵੇ ਦੇ ਰਹਿ ਆਵਾਜ਼ ਵਿੱਚ ਚੋਰ ਕਰਦੇ ਆਵੇਂ ਦੇ ਰਹਿ ਫੁੱਲਾਂ ਵਿੱਚ ਦੇ ਦੇ ਰਹਿ ਦੇਖ ਕਰਕੇ ਬਾਬਾ ਸ੍ਰੀ ਚੰਦ ਨੇ ਜੋ ਗੁਰੂ ਨਾਨਕ ਸਾਹਿਬ ਬਾਰੇ ਵਿਖਿਆ ਪਰ ਗੁਰੂ ਨਾਨਕ ਸਾਹਿਬ ਉਹ ਪਛਾਣ ਲੈਂਦਾ ਸੀ ਬ੍ਰਹਮ ਗਿਆਨੀ ਕੀ ਗੱਲ ਬ੍ਰਹਮ ਗਿਆਨੀ ਜਾਣੇ ਬਾਬਾ ਸ੍ਰੀ ਚੰਦ ਬ੍ਰਹਮ ਗਿਆਨ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਮੇਰਾ ਘਾਰ ਹੀ ਕਹਿੰਦੇ ਰਹਿ ਪਰ ਗੁਰੂ ਨਾਨਕ ਸਾਹਿਬ ਵੀ ਬਹੁਤ ਪਿਆਰ ਕਰਦੇ ਸੀ ਆਪ ਜੀ ਦਾ ਹਰ ਵੇਲੇ ਬਖਸ਼ਾ ਮੇਰਾ ਦਇਆ ਦੇ ਮੇਰੇ ਲਈ ਜਵੀ ਕਹੇ ਜੀ ਇੱਕ ਫਜ਼ਰ ਤੇ ਉਹਨਾਂ ਨੂੰ ਵੀ ਜਿਹੜਾ ਪ੍ਰਚਾਰ ਮੈਂ ਕਰਨ ਆਇਆ ਪਰ ਮੇਰੇ ਘਰ ਐਸੀ ਉਸ ਧਿਆਨ ਦੇ ਨਾਲ ਜੁੜੀ ਹੈ ਤੇ ਬਾਬਾ ਸ਼੍ਰੀ ਚੰਦ ਬਹੁਤ ਜ਼ਿਆਦਾ ਉਹਨਾਂ ਦਾ ਧਿਆਨ ਉਹਨਾਂ ਦੀ ਜੀਵਨ ਤੇ ਫਰਗਾਸ਼ ਉਹਨਾਂ ਦੀ ਸੋਚ ਦਾ ਗਿਆਨ ਉਹਨਾਂ ਦੀ ਨજર ਦਾ ਗਿਆਨ ਉਹ ਇਤਰਾ ਸੀ ਕਿ ਜਿਵੇਂ ਇੱਕ ਬੜੀ ਇੰਨੀ ਸ਼ਕਤੀ ਸੀ ਹਰ ਬੰਦੇ ਦਾ ਦਿਲ ਦਾ ਬਗਲ ਗਿਆ ਆ ਜੋ ਚੀਜ਼ ਦੀ ਲੋੜ ਹੈ ਉਹ ਲਈ ਚੀਜ਼ ਫੇਰੇ ਦੀ ਨੂੰ ਬੜਾ ਸੋਚਣ ਵਾਲੀ ਗੱਲ ਹੈ ਕਿ ਨਾਮ ਉਸ ਨੇ ਰਾਤਨਾ ਕੀਤੀ ਰਾਤਨਾ ਕੀ ਮੈਂ ਮੈਡੀਟੇਸ਼ਨ ਕੀਤਾ ਮੈਡੀਟੇਸ਼ਨ ਕਰਨ ਦੇ ਨਾਲ ਦੁਆਏ ਤੇ ਇੱਕ ਰੂਪ ਹੋ ਗਿਆ ਗੁਰੂ ਰਾਂਝਾ ਦਾ ਆਵਣ ਕੇ ਨਾਮ ਦੀ ਗੱਲ ਕੀਤੀ ਲੜੀ ਬੱਝੀ ਹੋਈ ਜਿਹੜੀ ਨਾਮ ਦੇ ਨਾਲ ਜੁੜੀ ਹੋਈ ਹੈ ਨਾਮ ਦੇ ਨਾਲ ਇਹ ਗਿਆਨ ਜੁੜਿਆ ਹੈ ਨਾਮ ਦੇ ਨਾਲ ਹੀ ਤਰ੍ਹਾਂ ਰੱਬ ਜੁੜਿਆ ਹੈ ਨਾਮ ਦੇ ਨਾਲ ਹੀ ਸਾਰੀ ਕਾਰਨਾਟ ਜੁੜੀ ਹੋਈ ਹੈ ਨਾਮ ਦੇ ਨਾਲ ਹਰ ਚੀਜ਼ ਜੁੜੀ ਹੋਈ ਹੈ ਦੇਖ ਕਰਕੇ ਨਾ ਚੀਜ਼ਾਂ ਦੇ ਵਿੱਚ ਆਪਾਂ ਸਾਰੀ ਪਿੱਛੇ ਚਲੇ ਜਾਈਏ ਤੇ ਜੀਵਨ ਜਿਸ ਵਿੱਚ ਆਪਰੇ ਕਰੋ ਮੇਰੇ ਪਿਤਾ ਨਾਲ ਪਿਆਰ ਕਰੋ ਤੇਰੇ ਪਿਤਾ ਦੇ ਕੋਲੋਂ ਰਹਿਣ ਦਾ ਲਓ ਮੇਰਾ ਲਓ ਤੇ ਹਜਰਤ ਮੁਹੰਮਦ ਸਾਹਿਬ ਵੀ ਇਹ ਗੱਲ ਕਹੀ ਆਵਾਦਤ ਕਰੋ ਕੀ ਹੈ ਪੂਜਾ ਕਰਨੀ ਆਵਾਦਤ ਕੀ ਹੈ ਮੁਹੱਬਤ ਕਰਨੀ ਬਾਦਤ ਕੀ ਹੈ ਉਹਨੂੰ ਯਾਦ ਕਰਨਾ ਇਹ ਹਰ ਨੇ ਸਾਰਿਆਂ ਨੇ ਮੋਜਸਰੇ ਵੀ ਇਹ ਗੱਲ ਕਹੀ ਅੰਦਾਮ ਤੋਂ ਕੋਈ ਬਾਹਰ ਨਹੀਂ ਗਿਆ ਪਰ ਅਸਲ ਗੀਤ ਕੀ ਹੈ ਇਹਦੇ ਥੋੜਾ ਜਿਹਾ ਭੇਡ ਹੋ ਜਾਂਦਾ ਜਾ ਕੇ ਇਹ ਕਰੀ ਜਾਂਦੇ ਆ ਫਿਰ ਆਪਾਂ ਅਰਦਾਸ ਕਰਦੇ ਆ ਆਪਾਂ ਕੁਝ ਕਹਿੰਦੇ ਆ ਪ੍ਰੇਰ ਕਰਦੇ ਆ ਆਪਾਂ ਕੁਝ ਕਹਿੰਦੇ ਆ ਇਹ ਇਵਾਜ਼ਤ ਕਰਦੇ ਆ ਤਾਂ ਵੀ ਆਪਾਂ ਕੁਝ ਕਹਿੰਦੇ ਆ ਮੈਡੀਟੇਸ਼ਨ ਇੱਥੇ ਜਾ ਕੇ ਥੋੜਾ ਜਿਹਾ ਉਹ ਤਰੀਕੇ ਦੇ ਅੰਦਰ ਚਲਾ ਜਾਂਦਾ ਹੈ ਕਿ ਉਹ ਮੈਡੀਟੇਸ਼ਨ ਦੇ ਵਿੱਚ ਨਾਮ ਬੋਲਣ ਦੀ ਲੋੜ ਨਹੀਂ ਨਾ ਕੁਝ ਕਹਿਣ ਦੀ ਲੋੜ ਹੈ ਸ ਮੈਡੀਟੇਸ਼ਨ ਦੇ ਵਿੱਚ ਐਸਮਾਤੀ ਚਲਾ ਗਿਆ ਤੇ ਫਿਰ ਸੁਣਨ ਲੱਗ ਪਿਆ ਕਿ ਰੱਬ ਕੀ ਕਹਿੰਦਾ ਹੈ ਮੈਡੀਟੇਸ਼ਨ ਦਾ ਇਹਨਾਂ ਕਿ ਉਹ ਅਸੀਂ ਕਹਿੰਨੇ ਆ ਰੇੜ ਦੇ ਵਿੱਚ ਕੁਝ ਬੋਲਨੇ ਆ ਜਦੋਂ ਅਸੀਂ ਅਰਦਾਸ ਕਰਦੇ ਅਸੀਂ ਕਹੀ ਜਾਂਦੇ ਆ ਜਦੋਂ ਅਸੀਂ ਨਮਾਜ਼ ਕਰਦੇ ਕੁਝ ਆ ਜਿਵੇਂ ਦਾ ਮੈਡੀਟੇਸ਼ਨ ਹੁੰਦੇ ਵੇ ਸਾਹੀ ਸੁਣਨੇ ਆ ਕੀ ਸੁਣਨੇ ਆ ਉਹ ਜਿਹੜਾ ਬਦੀ ਰੱਬ ਦਾ ਪਿਆਰ ਰੱਬ ਸਾਨੂੰ ਕੀ ਕਹਿੰਦਾ ਜੇ ਮਹਾਰਾਜ ਬਾਣੀ ਆਈ ਬਾਣੀ ਕਿਹਦੀ ਆਈ ਜਿਹੜੀ ਗਿਆਨ ਦੇ ਨਾਲ ਬਾਣੀ ਆਈ ਇਹਦੇ ਗਿਆਨ ਨਾਲ ਉੱਤੇਰ ਦੀ ਲੋੜ ਨਹੀਂ ਉੱਤੇ ਫਿਰ ਦੀ ਲੋੜ ਉਹਦਾ ਆ ਹੀ ਗਈ ਉਹਨੂੰ ਸੁਣਨ ਲੱਗ ਪਏ ਕਿ ਅਸਲ ਮੈਡੀਟੇਸ਼ਨ ਦਾ ਫਰਕ ਪੈਂਦਾ ਜਾ ਕੇ ਥੋੜਾ ਜਿਆ ਇੱਥੇ ਠਿਕਣੇ ਦੇ ਪਾਠ ਕਰਨੇ ਆ ਉਹ ਕਹਿੰਦੇ ਅਸੀਂ ਬਾਦ ਕਰਨੇ ਆ ਉਹ ਕਹਿੰਦਾ ਅਸੀਂ ਪ੍ਰੇਅਰ ਕਰਨੇ ਪਰ ਅਸਲ ਗੱਲ ਇਹ ਸਾਰੇ ਆਪਾਂ ਕਰਦੇ ਆ ਆਪਾਂ ਕੁਝ ਮੰਗਨੇ ਆ ਆਪਾਂ ਕੁਝ ਕਹਿਣੇ ਆ ਕਿ ਬਰੇ ਜਦੋਂ ਮੈਡੀਟੇਸ਼ਨ ਕਰੀਦਾ ਕੁਝ ਨਹੀਂ ਕਹਿਦਾ ਅੰਦਰ ਸਵਾਸਾਂ ਅੰਦਰੋਂ ਸੁਣੋਗੇ ਤੇ ਜਿਵੇਂ ਉਹਨਾਂ ਆ ਗਈ ਭਈ ਆਈ ਉਸ ਵੇਲੇ ਉਹ ਜਿਹੜੀ ਬਿਨਾ ਕੁਝ ਮੰਗਣ ਤੋਂ ਮੇਰਾ ਕੁਝ ਬੋਲਣ ਤੋਂ ਉਹ ਵਹੀ ਆ ਗਈ ਰਈ ਕਿਹੜੀ ਆ ਗਈ ਕਿ ਜਿਹੜੀ ਗਿਆਨ ਆ ਗਿਆ ਗਿਆਨ ਉਹ ਜਦੋਂ ਰੱਬ ਦੀ ਬਾਤ ਆਈ ਫਿਰ ਉਹ ਲਿਖਤ ਜੀ ਆ ਗਈ ਉਹਨਾਂ ਦਾ ਗਿਆਨ ਬੋਲਿਆ ਉਹ ਫਿਰ ਪੜਨ ਦੀ ਵੀ ਆ ਗਿਆ ਪਰ ਹਰ ਵੇਲੇ ਇਹਨਾਂ ਚੀਜ਼ਾਂ ਦੇ ਨਾਲ ਬੇਰ ਦੇ ਨਾਲ ਉਜਾ ਦੇ ਨਾਲ ਆਵਾਜ਼ ਦੇ ਨਾਲ ਇਹ ਠੀਕ ਹੈ ਇਸੀ ਚਾ ਵੜਿਆ ਪਵਿੱਤਰ ਨੇ ਇਹ ਮਰਜਾਦਾ ਨੇ ਸਾਡੀਆਂ ਆਸਾਨਾ ਕਰਨਾ ਹੀ ਕਰਨਾ ਹੈ ਪਰ ਅਸਲ ਸਾਡੇ ਸੋਚਣ ਤੋਂ ਬੜਾ ਟੀਜ ਆਉਂਦੀ ਉਹ ਗਿਆਨ ਆਉਂਦਾ ਉਹਨੂੰ ਅਸੀਂ ਕਹਿੰਦੇ ਆ ਤੁਰਦੀ ਬਾਣੀ ਆਈ ਜਿਹਨੇ ਸਗਲੀ ਚਿੰਤ ਮਿਟਾਈ ਉਹ ਬੇਚਿੰਤਾ ਮੁੜ ਜਾਣੀਆਂ ਜਦੋਂ ਤੁਰਦੀ ਬਾਣੀ ਆਉਣੀ ਤੁਰਦੀ ਬਾਣੀ ਕਦੋਂ ਆਈ ਜਦੋਂ ਇਲੈਕਟ੍ਰੋਮੈਟ ਕਾ ਗਏ। ਅਸੀਂ ਕੁਛ ਨਹੀਂ ਕੀਤਾ ਕਿ ਪਾਣੀ ਆਵੇ। ਉਹ ਪਾਣੀ ਇਲੈਕਟ੍ਰੋਮੈਟ ਵੀ ਆ ਗਏ। ਇਹ ਕਰਕੇ ਮੈਡੀਟੇਸ਼ਨ ਦੇ ਦੌਰ ਕਿਉਂ ਦੇ ਰਹੇ ਮੈਡੀਟੇਸ਼ਨ ਕੀ ਚੀਜ਼ ਮੈਡੀਟੇਸ਼ਨ ਜਿਹੜੀ ਸਾਡੇ ਅੰਦਰ ਬਰਿਆਈ ਆ ਚੁੱਕੀ ਹੈ। ਉਹਨੂੰ ਬਾਹਰ ਕੱਢੇਗਾ, ਸਾਫ਼ ਕਰ ਦੇਗਾ। ਜਿਹੜੀ ਬਰਿਆਈ ਆਉਣ ਨੂੰ ਸੋਚ ਰਹੀਏ ਉਸ ਬਰਿਆਈ ਨੂੰ ਅੰਦਰ ਨਹੀਂ ਆਉਂਦੇ ਤੱਕ ਉਹਨੇ ਵੀ ਵੀ ਮੈਡੀਟੇਸ਼ਨ ਦਾ ਮਤਲਬ ਗਿਆਨ ਫਿਰ ਉਹਨਾਂ ਨੂੰ ਇੱਕ ਬਹੁਤ ਵੱਡੀ ਤਾਰਕਾਈ ਜਿਹਨੂੰ ਕਹਿੰਦੇ ਨੇ ਹਿੰਕਾ ਨਾ ਕਰੋ ਜਿਹਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਵੇਖੀ ਤੇ ਜ਼ੋਰ ਦਿੱਤਾ ਅਕੀਦ ਪਾਪ ਤੋਂ ਡਰ ਨਾ ਰਹਿ ਉਹਦੇ ਕੌਸ਼ਿਸ਼ ਵਿੱਚ ਆਉਂਦਾ ਹੈ ਤੇ ਕਿਸੇ ਲਈ ਪਲਾਨ ਵਿੱਚ ਆਉਂਦਾ ਹੈ ਕਿਸੇ ਹੈ ਕਿਸੇ ਲਈ ਐਕਸ਼ਨ ਦੇ ਵਿੱਚ ਆਉਂਦਾ ਹੈ ਦੇ ਵਿੱਚ ਕਰਕੇ ਮੈਡੀਟੇਸ਼ਨ ਤੋਂ ਮਗਰੋਂ ਆਹ ਗੁਰੂ ਸਹਿਬਾਨ ਨੇ ਮੈਡੀਟੇਸ਼ਨ ਕੀਤਾ ਆਹ ਦਰਵੇਸ਼ਾ ਨੇ ਮੈਡੀਟੇਸ਼ਨ ਕੀਤਾ ਆਹ ਪਕਮਰਾ ਨੇ ਮੈਡੀਟੇਸ਼ਨ ਕੀਤਾ ਵਾ ਮੈਡੀਟੇਸ਼ਨ ਤੋਂ ਮਗਰੋਂ ਵੀ ਬੈਠਦਾ ਅਜਾ ਮੈਡੀਟੇਸ਼ਨ ਤੋਂ ਮਗਰੋਂ ਹੀ ਗਿਆਨ ਆਇਆ ਤੇ ਬਾਬਾ ਸ੍ਰੀਚੰਦ ਉਸ ਮੈਡੀਟੇਸ਼ਨ ਵਿੱਚ ਚਲੇ ਗਏ ਕਿ ਜਿਹੜੀ ਮੈਡੀਟੇਸ਼ਨ ਦੇ ਵਿੱਚ ਰੱਬ ਦੀ ਦਾ ਗਿਆਨ ਰੋਸ਼ਨੀ ਨੇ ਕਿਉਂ ਨਹੀਂ ਆਉਂਦੀ ਕਰਕੇ ਸਭ ਤੋਂ ਵੱਡੀ ਈ ਮੈਡੀਟੇਸ਼ਨ ਸੁਣਨਾ ਬਾਤ ਪੂਜਾ ਕਰਨੀ ਬੋਲਣਾ ਇਸ ਕਰਕੇ ਘਰ ਲਈ ਮੈਡੀਕੇਸ਼ਨ ਵੀ ਕਰਿਆ ਕਰੋ ਮੈਡੀਕੇਸ਼ਨ ਕਰਨ ਦੇ ਨਾਲ ਤੁਹਾਡਾ ਜਿਹੜਾ ਅੰਦਰ ਇੱਕ ਮਨ ਹੈ ਉਹ ਮਾਨਸਿਕ ਹੋਇਆ ਹੈ ਹਰ ਬੰਦੇ ਦਾ ਉਹ ਮਨ ਨਰਾਸ ਹੋਇਆ ਹੋਇਆ ਹੈ ਉਸ ਮਨ ਬਿਮਾਰ ਹੋਇਆ ਹੈ ਉਸ ਮਨ ਦੀ ਬਿਮਾਰੀ ਵਾਸਤੇ ਮਨ ਦਾ ਤੋਸਤਾ ਹਰ ਹੈ ਹਿਰਦੇ ਰੱਖੋ ਸੰਭਾਲ ਮਾਰਾ ਕਹਿੰਦੇ ਮਨ ਨੂੰ ਕਿਹੜੀ ਖਰਾਜ ਦੇਣੀ ਹੈ ਨਾਮ ਦੀ ਮੈਡੀਕੇਸ਼ਨ ਦੀ ਮਾਰੇ ਜੇ ਨਾਲ ਜੁੜਨ ਦੀ ਤੇ ਰੋਜ ਰੋ ਖਰਾਗ ਮਿਲੇਗੀ ਮਨ ਤੇ ਵਿਜੇ ਹੋ ਗਈ ਸਾਰੇ ਸੰਸਾਰ ਤੇ ਵਿਜੇ ਹੋ ਗਈ ਮਾਨੇ ਖਰਾਬੀਆਂ ਕਰਦਾ ਮਨ ਕਿ ਨੂੰ ਕਹਿੰਦੇ ਨੇ ਜੇ ਅੰਦਰੀ ਕ્રોਧ ਆਉਂਦਾ ਹੈ ਸਾਰੀਆਂ ਚੀਜ਼ਾਂ ਤੇ ਵਿਜੇ ਪਾਈ ਗਈ ਜਿਹੜੀ ਵਿਜੇ ਨਾਮ ਜਪਣ ਦੇ ਨਾਲ ਵਿਜੇ ਪੈਂਦੀ ਹੈ ਜਿੰਦੀ ਵੇਲੀ ਵਿਜੇ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਸਾਹਿਬ ਨੇ ਆ ਕੇ ਕਹੀ ਇਸ ਕਰਕੇ ਤੋ ਮੱਕਾ ਦੇ ਮੋਜਿਸੇ ਮੈਨੂੰ ਪੱਕੀ ਯਕੀਨ ਲੱਗੇ ਕਿ ਮੈਡੀਟੇਸ਼ਨ ਦੇ ਉੱਤੇ ਰੱਬ ਦੇ ਪਿਆਰ ਕਰਨ ਦੇ ਨਾਲ ਉਹ ਸਾਰੇ ਉਹਨਾਂ ਜਿਆਦਾ ਦੁੱਤੇ ਆਪ ਜੀ ਦੇ ਪਾਉਂਦੇ ਨੇ ਜਿੱਥੇ ਮੈਡੀਟੇਸ਼ਨ ਦਾ ਦਿਨ ਮਨਾਇਆ ਜਾਂਦਾ ਹੈ ਜਿੱਥੇ ਪਿਆਰ ਦਾ ਦਿਨ ਮਨਾਇਆ ਜਾਂਦਾ ਹੈ ਕਿਉਂ ਸਾਰਿਆਂ ਨੇ ਇਹੀ ਜੋਰ ਦਿੱਤਾ ਹੈ ਤੇ ਦਰਸ਼ਕਾਂ ਵਿੱਚ ਜਿਹਨੂੰ ਵੇਖੋ ਜਹਾਂ ਦੇ ਵਿੱਚ ਜਿਹਨੂੰ ਵੇਖੋ ਉਸ ਰਵਾਤਮਾ ਨੂੰ ਹਰ ਜਗ੍ਹਾ ਤੇ ਵੇਖੋ